ਸਿੰਦਰ ਬਾਣਾ ਸਮਰੇ ਨਹੀਂ ਨੰਨੇ ਨਾ ਤੁਧ ਨਾਮ ਲਿਆ ਸਿੱਤ ਅਲਗ ਲਫਦਾ ਦੋਲਾ ਹੁਣੇ ਸਿੰਦਰ ਗਿਆ ਇਹ ਗਿਆ ਇਹ ਇਹ ਜਿਹੜਾ ਭੰਗਾ ਲਫਦਾ ਨਾ ਗੱਗੇ ਦੀ ਸਤਿ ਵਿੱਚ ਉਣ ਵਰਤਦੇ ਆ ਸੀ ਅਜਾ ਗਿਆਨ ਵੀ ਵਰਤਿਆ ਹੋਇਆ ਗਿਆਨ ਗਵਾਇਆ ਦੂਜੇ ਪਾਇਆ ਗਰਭ ਗਲੇ ਵਿਖਾਇਆ ਬੱਬਾ ਵਰਤਿਆ ਜਾਂਦਾ ਸੀ ਉਸ ਵੇਲੇ ਗਿਆਨ ਵਾਸਤੇ ਗਿਆਨ ਗੰਦੀ ਉਪਰਸੀ ਕਹਦੇ ਜਿਹਨੂੰ ਗੰਗੇ ਦੇ ਵਰਤਿਆ ਜਾਂਦਾ ਸੀ ਤਾਂ ਕੱਖਾਂ ਗੱਦਾਂ ਤੱਕਾਂ ਵਰਤੋਂ ਗੰਗੇ ਇਸੇ ਬੁਕਤੀ ਦਾ ਹੈ। है ਸਾਰਿਆਂ ਦੇ ਵਿੱਚ ਇਹ ਗੰਗਾਂ ਦੇ ਵਿੱਚ ਗੱਦਾਂ ਹੈਗਾ। ਨੱਕਾਜ ਮੋਲਿਆ ਹੈ ਗੱਦਾਂ। ਗਿਆਦੀ ਲਫ਼ਜ਼ ਸੀ। ਗਿਆਦੀ। ਗਿਆਦੀ ਤਾਂ ਗਿਆਦੀ ਵਰਤਿਆ। ਕਰਤਕ ਆਗੇ ਵਾਜ ਨਕਾਲੀ ਛੱਟੇ ਸਿੱਧਾ ਰਫੂਤ ਇਸ ਹੱਦ ਸਿੱਧਾ ਯਰਾ ਰਫਾ ਸਿੱਧ ਸਬੂਦਾ ਲੁਕਾਇਆ ਸਿੱਧਾ ਸੰਤ ਪਰਬਤ ਬੇਦਲੀ ਵੀਰ ਤੁਮਾਂ ਗੱਲ ਰਹਾ ਆ ਉੱਤੇ ਟਿੱਪੀ ਪਾਦਾਂਗੇ ਸਿੱਧ ਵੜ ਜਾਊਗਾ ਦਾ ਟਿੱਪੀ ਪਾਦਾਂਗੇ ਸਿੱਧ ਵੜ ਜਾਊਗਾ ਸਿੱਧ ਸੇਰੂ ਚਾਰੀ ਤਾਂ ਦਾਇਰਾ ਰਹਿ ਜੂ ਸਿੱਧੇ ਵੱਡੂ ਰਹਿ ਜੂਗਾ ਫਿਰ ਉਹ ਕਾសារ ਅਖਰਾਜ ਬੋਲ ਹੁੰਦਾ ਹਾਂ ਸਿੰਧ ਨਹੀਂ ਆਈਆਂ ਯੇ ਯੇ ਨਹੀਂ ਨਹੀਂ ਸਮਰੇ ਨਹੀਂ ਸੁਰੇੜ ਦੇ ਮੈਂ ਨਾ ਤੋ ਨਾਮ ਲਿਆ ਆਪਣੇ ਆਪ ਨੂੰ ਤਾਂ ਗਿਆਨ ਦੱਸਾ ਬੈਠੇ ਤੂੰ ਉਹ ਜੋ ਕੋ ਪੜ ਲਿਆ ਜੇ ਪੜ ਲਿਆ ਮੈਂ ਤਾਂ ਜਨਰਲ ਲੈਣਾ ਸੀ ਲੈ ਰਿਹਾ ਹੁਣ ਕੀ ਲੋੜ ਐ ਐ ਤੇ ਪੰਜ ਦਾਤਾ ਜਿੱਥੇ ਤੱਤੇ ਨੂੰ ਉੱਪਰ ਵੀ ਹੈ ਤੱਤੇ ਜਿਹੜਾ ਦੂਗਾ ਤੱਤਾ ਰੋ ਉੱਪਰ ਵੀ ਹੈ ਇੱਕ ਵਜਾ ਦੇਦਾ ਮੈਂ ਤੁਸੀ ਇਹਦੇ α5 ਡਿਗਰੀ ਕਰਨਾ ਹੋਗੇ ਹਾਂ 5 ਦਾ ਬਤਾ ਅੱਧਾ 5 ਹੈ ਗੁਰਬਾਣੀ ਜੀ ਪਰ ਉੱਤਕੜਾ ਕੇ ਕਹਿੰਦਾ ਵੀ ਇਹਦਾ α5 ਡਿਗਰੀ ਤਾਂ ਤਰ ਬਸ ਇੱਕ ਦਮ ਬੈਠੇ ਉਹ ਕਹਿੰਦੇ ਹਾਂ ਸਾਰਾ ਹੀ ਹੈਗਾ ਦੇਖ ਲੈ ਮੈਨੂੰ ਦਿਖਾ ਦੇ ਉਹ ਕਹਿੰਦਾ ਜੀ ਠੀਕ ਹੈ ਤੂੰ ਕਹ ਮੈਂ ਕਹਿੰਦੇ ਜਟੇ ਪੰਜ ਹਜ਼ਾਰ ਦਾ ਮਤਲਬ ਹੈ ਪਰਮਤਤ ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਨ ਜੋਤ ਸਰੂਪ ਦਸ ਘੜੀ ਬੈਠ ਰਿਹਾ ਕਿਵੇਂ ਬੈਠਾ ਕਹਿ ਸਕਦੇ ਹੈ ਵੀ ਤਾਂ ਇਹ ਰੂਪ ਜ ਨਹੀਂ ਪਤਾ ਉਹ ਜੀ ਦੀਰ ਉਹ ਤੇ आई जो ਆਈ ਜੋ ਸਿਰ ਉਹ ਸਿੰਧ ਉਹ ਕਹਿੰਦਾ ਆਪਣੇ ਅੰਮ੍ਰਿਤ ਮੈਂ ਸਾਗਰ ਆਉਣ ਗਿਆਨ ਦਾ ਬੰਦ ਲੋੜ ਨਹੀਂ ਹੈ ਇਹ ਬਦਵਾਨ ਨੇ ਇਹ ਬੂਰਖ ਨੇ ਸਾਰੇ ਇਹ ਸਮਝਦੇ ਨੇ ਵੀ ਅਸੀਂ ਵੀ ਬਣਦੇ ਆ ਲੋਕ ਪਾਗਲ ਸਾਡੇ ਕੋਲ 24 ਸੋਝੀਏ ਜਜ਼ਬਾਵੇ ਸੋਝੀਏ ਤੁਸੀਂ 24 ਘੰਟੇ ਦੇ ਵਿੱਚ ਇੱਕ ਘੰਟਾ ਦੀ ਗੱਡੀ ਸੁਰਤ ਰਹਿਦੀ ਗੁਰਬਾਨੀ ਦਾ ਜੁੜੀ ਹੋਈ ਤੁਸੀਂ ਜਾਣਦੇ ਨਹੀਂ ਸਾਡੂ ਤੁਸੀਂ ਕੀ ਗੱਲਾਂ ਕਰਦੇ ਹੋ ਕਿਹੜੀ ਦੁਨੀਆ ਰਹਿਦੀ ਜਦੋਂ ਇਹ ਆਪ ਬਾਵਨ ਕੋਡੋਂ ਤੁਸੀਂ ਪਾਵੇ ਕਹਿੰਦੇ ਹੋ ਉਹ ਵੀ ਜਦੋਂ ਤੁਸੀਂ ਕਿਤਾਬ ਇਹਨਾਂ ਤੇ ਤੁਸੀਂ ਕਿਤਾਬਾਂ ਪੜ੍ਹੀਆਂ ਨੇ ਸਾਰਿਆਂ ਦੇ ਬਾਣੀ ਕਿਸੇ ਨੂੰ ਨਹੀਂ ਸਮਝੀ ਜੋ ਤੁਸੀਂ ਪੜ੍ਹੇ ਕੁਈ ਤਾਂ ਬਾਣੀ ਖੋਜੀ ਹੋ ਕੋਈ ਨਹੀਂ ਉਪਟਿਆਲੇ ਵਾਲਾ ਵੀ ਜਿਹੜਾ ਆਪਣੇ ਨਾਲ ਗਿਆ ਸੀ ਨਾ ਉਹ ਕਾਨੂੰ ਦੁਆਇਰ ਨਾਲ ਆਪਣੇ ਬੋਲਦਾ ਸੀ ਕੀ ਲੋਸੀ ਇਹ ਘਰ ਵਾਲੀ ਵੀ ਉੱਥੇ ਇਹਨਾਂ ਨੂੰ ਐਵੇਂ ਧੋਆ ਪੁੱਛ ਚੱਕੀ ਫਿਰ ਤੇ ਵੀ ਪਤਾ ਨਹੀਂ ਕੀ ਹੈ ਤੁਹਾਡੇ ਕੋਲ ਹੈ ਕੀ ਜੇ ਕਹੇ ਹਾਜੋ ਫਿਰ ਬਦਾਨ ਚਾਹੋ ਫਿਰ ਪਤਾ ਲੱਗੇ ਜਾ ਤਾਂ ਬੁਨਾਜ ਹਰ ਤੱਕ ਅੱਜ ਚਲੀ ਹੋ ਗਈ ਆਜਣ ਜੀ ਨੇ ਕਰ ਦਿੱਲੀ ਚਰਚਾ ਸੱਲਣ ਜਾਂ ਇਹਦਾ ਜਵਾਬ ਦੇਣ ਅਰੇ ਸੈਂਦਰ ਨੀਆ ਨੀਆ ਸਮਰੈ ਨਹੀਂ ਸਮਰੈ ਜੇ ਤੇਰੇ ਕੋਈ ਨਾ ਗਿਆਨ ਹੈ ਤੈਨੂੰ ਕਿਹਾ ਤਾਂ ਨਹੀਂ ਤੂੰ ਕੀ ਕਰ ਰਿਹਾ ਕਾਤਾ ਕੀ ਰਿਹਾ ਦੇਵਨਾ ਬਾਇਆ ਦਾ ਹੋਇਆ ਇਹ ਕਹਿਣਾ ਮੇਰੇ ਕੋ ਸਬੂਧਾ ਡੱਡਾ ਗਿਆ ਨੇ ਲੜਾਈ ਤੇਰੀ ਉੱਚੀ ਕੁਰਸੀ ਦੀ 20 ਸੀ ਦੀ ਕੁਰਸੀ ਤੇ ਤੇਰੀ ਜਗ੍ਹਾ ਹੈ ਤੈ ਵੀ ਸੀ ਦੀ ਕੁਰਸੀ ਤੇ ਕੀ ਲੜਨ ਤੈਂ ਤਰ ਤੇ ਕੀ ਲੜਨ ਕਹਿ ਮਾਇਆ ਤੇ ਕੀ ਲੜਨ ਤੇਰੇ ਅੱਧਾ ਟਪਾਉ ਕਿਉਂ ਨਹੀਂ ਆਇਆ ਦੀ ਖੁੱਖ ਕਿਉਂ ਹੈ ਦੇਖੋ ਜਿਹੜਾ ਸਿਤਾਰਾ ਉਹ ਖਾਰੇ ਪਾੜੀਦਾ ਖਾਰੀ ਖਾਰਾ ਗਿਆਨ ਹੈ ਖਾਰੀ ਬੀੜ ਵਾਲਾ ਇਹ ਖਾਰੀ ਗੱਲ ਹੀ ਬੀੜ ਰੋੜੇ ਬਾਇਆ ਦੇ ਅਰਥ ਜਿਹੜਾ ਵਿਚ ਵਿੱਚ ਲੜ ਜਾਣੇ ਤਾਂ ਖਾਰੀ ਹੋ ਜਾਂਦੀ ਹੈ ਜਦ ਅਰਥਾਂ ਦੇ ਨਾਤ ਹੋ ਜਾਣ ਅਰਥਾਂ ਤੇ ਨਾਤ ਹੋਏ ਕਈ ਲਫ਼ਜ਼ਾਂ ਦੇ ਹੋਰ ਦੇ ਹੋਰੇ ਅਰਥ ਬਣਾਏ ਜੀ ਮੰਨੇ ਨਾਤੇ ਦਾ ਨਾਮ ਲਿਆ ਖਾਰੇ ਦਾ ਮਤਲਬ ਹੈ ਆ ਜਿਹੜਾ ਸੁਪੁੱਤਰ ਹੈ ਨਾ ਖਾਰਾ ਹੈ ਆਪਣਾ ਪਾਣੀ ਦਾ ਸੰਸਾਰੀ ਗੁਰ ਜਿਹੜਾ ਨਿਰਾਕਾਰ ਦਾ ਸਾਗਰ ਹੈ ਸੁਖ ਸਾਗਰ ਉਹ ਦੁੱਧ ਦਾ ਸਾਗਰ ਹੈ ਕੀਰ ਉਹਦੇ ਵਿੱਚ ਤਤ ਗਿਆ ਤਤ ਕੀਣਾ ਕੋਣ ਕਿਣਾ ਇਹ ਲੋਕਾਂ ਲੋੜ ਵਾਲਾ ਜਾਬੇ ਵਰਤ ਲੋੜ ਹੋਰ ਵੀ ਇਹਰਾ ਗੋਸ਼ਪੀ ਇਹ ਸੁਪੀ ਜੋ ਵਿੱਚ ਹੋਈ ਦੇ ਦਾਰ ਟੱਕਰ ਦੇ ਵਿੱਚ ਜਿਹੜੀ ਖਾ ਲੋ ਫੜ ਕੇ ਵਿੱਚੋਂ ਵਿੱਚੋਂ ਗਾਲੋ ਕੇਕੜੇ ਜੋ ਮਰਜੀ ਖਾ ਲੋ ਸਰੀਰ ਦੀ ਖਰਾਕ ਬਥੇਰੀ ਹੈ ਆਤਮਾ ਦੀ ਖਰਾਕ ਨਹੀਂ ਹੈ ਇਹਦੇ ਵਿੱਚ ਇਸ ਬੁੱਧਰ ਤੇ ਇਸ ਬੁੱਧਰ ਦੇ ਵਿੱਚ ਸੰਸਾਰੀ ਦੀ ਆਤਮਾ ਦੀ ਖਰਾਕ ਕੋਈ ਨਹੀਂ ਇਰਾਨੀਆਂ ਲੋੜਾਂ ਆਤਮਾ ਦੀ ਖਰਾਕ ਵਾਲੀ ਨਹੀਂ ਹਨ ਇਹਨਾਂ ਦੀ ਇੱਛਾ ਆਤਮਾ ਦੀ ਖਰਾਕ ਵਾਲੀ ਨਹੀਂ ਹੈ ਇਹਨਾਂ ਨੇ ਗਿਆਲ ਜਿਹੜਾ ਲਿਆ ਹੈ ਸਾਰਾ ਆਤਮਾ ਦੀ ਖਰਾਕ ਵਾਸਤੇ ਡੀਵਰ ਤਿਆਰ ਹੂ ਕੀ ਆਤਮਾ ਦੀ ਖਰਾਕ ਵਾਸਤੇ ਵਰਤਦੇ ਬੇ ਸਬਰ ਤੇ ਨੋ ਆਤਮਾ ਦੀ ਖਰਾਕ ਦਾ ਸਬਰ ਵਿੱਚ ਉਦੋਂ ਤੱਕ ਹੂ ਲਿਆ ਜੀ ਲਾਇਆ ਨਹੀਂ ਜੇ ਤਰ੍ਹਾਂ ਇਹਨਾਂ ਗਿਆਲ ਸੀ ਤੋਂ ਉਸ ਸਰਵਲ ਵਾਸਤੇ ਕਿਉਂ ਦਿੱਸ ਤੇ ਬੋਲ ਕਿਤਾਬ ਨੂੰ ਨੇ ਨਾਤੂ ਦਾ ਨਾਮ ਲਿਆ ਚਾਰ ਗੱਲਣ ਦਾ ਭਰੀ ਫਿਰਦੇ ਪਿੱਛੇ ਟੰਕੀ ਦਾ ਸਾਰੀ ਭਰੀ ਹੋਈ ਚੈਰ ਕੋ ਪਟ્રોલ ਦੀ ਗੜੀ ਤੇ ਉਹ ਗਿਆ ਪਟ્રોલ ਤੂੰ ਘੜੀ ਹੈ ਕਹਿੰਦਾ ਕੀ ਹੈ ਪਿੱਛੇ ਇਹਦਾ ਪਟ્રોલ ਗੱਡੀ ਕਾਹਦੇ ਖੜੀ ਐ ਡਾਂਕੀ ਜੋ ਬੋਗਿਆ ਕਿ ਪਿਛੇ ਤੋਂ ਲਾਹਦੇ ਪਾਲ ਪਟ્રોલ ਨਹੀਂ ਪਾਣੀ ਹੋ ਇਹਨੂੰ ਪਟ્રોલ ਕਹਿੰਦੇ ਪਟ્રોલ ਵਿੱਚ ਗੱਡੀ ਨਾ ਚੱਲੇ ਤਾਂ ਸਫਰ ਨਾ ਚੱਲੇ ਪਾੜੇ ਨੂੰ ਪਟ્રોલ ਕਹੀ ਜਾਂਦੇ ਪਾੜੀ ਆ ਵਿਚੇ ਤੁਹਾਡੇ ਹੁਪਾਇਾ ਹੈ ਪਟ્રોલ ਹੁੰਦਾ ਗੱਡੀ ਕਾਹਲ ਜਲਦੀ ਤੁਹਾਡੀ ਬੁੱਧੀ ਅੱਗੇ ਜਲਦੀ ਗਿਆਨ ਦਾ ਸਾਗਰ ਹੁੰਦਾ ਗਿਆਨ ਦਾ ਸਾਗਰ ਹੁੰਦਾ ਪਿੱਛੇ ਉਹੜਾ ਪਾਣੀ ਭਰਿਆ ਹੈ ਨਾ ਉਰਗਾਇ ਜੀ ਗਾਰ ਉਹ ਤੇ ਕਾਂ ਨਾ ਯਾਰੀ ਫੇ ਇਹਨੂੰ ਕਦੇ ਨਹੀਂ ਸਮਝਦੀ ਇਹਨੂੰ ਸਮਝਦੀ ਜੇ ਗਿਆਨ ਸਾਕਰ ਹੁੰਦਾ ਇਹਨੂੰ ਸਮਝ ਲੈਦੀ ਫੇਰ ਉਹ ਜਿਹੜੇ ਲਫਜ਼ਾਂ ਦੇ ਵਿੱਚ ਫੇਰ ਉਹ ਵੀ ਸਮਝ ਲੈਦੀ ਫੇਰ ਇਹ ਤੇ ਸਤਨੂੰ ਰੇਤੀ ਅਸਦੀ ਅੱਦੀ ਸੀ ਬੋਲਦੀ ਫੇ ਸਤਨੂੰ ਸੋਝੀ ਬੋਲਦੀ ਉਹ ਜਿਹੜੀ ਸਿੱਧੀ ਹੈ ਉਹ ਦਰਾਕਾਰ ਦੀ ਸੋਚੀ ਹੈ ਜਿਹੜੀ ਰਿੱਧੀ ਹੈ ਉਹ ਸੁਖਾਸ ਦੀ ਦਾ ਗਿਆਨ ਰਿੱਧ ਬਸ ਹੈ ਬਾਹਰ ਉੱਗ ਸਿੱਧ ਸੁਧ ਬੁਖ ਜੋਗ ਹੈ ਉਹ ਕਹਤੇ ਲਗਿਆ ਸੀ ਉਹ ਰਿੱਧੀ ਤਾਂ ਮੰਨਦੇ ਉਹਦੇ ਪਈਆ ਗਿਆਨ ਸੁਖਾਰੀ ਗਾਨ ਵਰਦੇ ਵਿੱਚ ਹੁੰਦਾ ਉਹ ਤਾਂ ਬਰਨੇ ਸੀ ਕਿਹਾ ਸੰਤਾਂ ਦੇ वरगोल पर्वतिकोल हृदय के पीछे होता है के रहता है संसारी ज्ञान खब्बे हाथ के रहता है बावलक रदबसा साहब का बावलक की मतलब है, बाँग। है संसारिक ज्ञान पाया जेड़ा संसारी ज्ञान पाया संसारिक ज्ञान खब्बे पास पाया अपनी बुद्धि वास्ते पाया अपनी बुद्धि रे पाया खब्बे पास अपनी बुद्धि खड़ी है ਸੱਜੇ ਪਾਸੇ ਪਾਸੇ ਨਰਾਕਾਰ ਦੀ ਬੁੱਧੀ ਖੜੀ ਹੈ ਇਸ ਕਰਕੇ ਬੁੱਢੇ ਨੂੰ ਆਦਮੀ ਨੂੰ ਸੱਜੇ ਪਾਸੇ ਬਿਠਾ ਲਦੇ ਨੇ ਦੁੱਧਾਂ ਤੇ ਸਜਾਤ ਵੜਿਆਈ ਦੇ ਐਵੇਂ ਹੀ ਬਿਠਾ ਸੱਜੇ ਪਾਸੇ ਆਪੇ ਖਪਿਆ ਚਲੋ ਪੁਛਾਦਰ ਪਰ ਕਰੂਏ ਦੇਖੋ ਠਾ ਜਿਹੜਾ ਦੇ ਦਿੱਤੇ ਨੇ ਉਹ ਸਾਤਾਂ ਦੀ ਪ੍ਰਕਾਰਵਲ ਖਾਰਦੇ ਦੀ ਪ੍ਰਕਾਰਵਲ ਦੇਗੂਰੇ ਅਜੂਰੀਲੇ ਉਹ ਬੂਰੀ ਏਥੇ ਇਹਨੂੰ ਵੇਰੋ ਕੰਨਾ ਮੇ ਤੇ ਅਗਾ ਭੁੜੀਆ ਦੇ ਨਾ ਪ੍ਰਕਾਰਵਲ ਮੁਰੂ ਹੀ ਲੱਗਣਾ ਬੰਦਾ ਫਿਰ ਉਹ ਫਿਰ ਇਹ ਤਾਂ ਪ੍ਰਕਾਰਵਾਂ ਹਿੱਤੋਗਾ ਢਾਲੀ ਸਾਰਾ ਨੇ ਸ਼ੁਰੂ ਕੀਤੀ ਇਹ ਇਹ ਮੁਰਦੀ ਪੂਜਾਲੀਆ ਪ੍ਰਕਾਰਵਲ ਸਾਡੀਆਂ ਪ੍ਰਕਾਰਵਾਂ ਨਿਹਾਰਕਾਰੀ ਨੇ ਉਲਟੀ ਰੇ मन ਉਲਟੀ रहे, साख ਸੋਕਰ ਉਲਟੀ ਰੇ ਉਹ ਸਖ ਦਾ ਦੀ ਪ੍ਰਕਰਮ ਹੋਈ ਇਹ ਸੰਤਾਲੀਆ ਡੋਦੀ ਇਹ ਤੇ ਉਹ ਸਿੱਧ ਦੂਰ ਪਾਸੇ ਨੂੰ ਕਰਦੇ ਨੇ ਸਾਧਾ ਨੇ ਦੂਰ ਪਾਸੇ ਕਰਤੀ ਸੀ ਇਹ ਕਾਲੀ ਸਾਧਾਲੀਆਂ ਕਰਦੇ ਨੇ ਨਾਲ ਉਹ ਸੀ ਉਹ ਖਾਲਸੇ ਵਾਲੀਆਂ ਕਰਦੇ ਨੇ ਜਿਹਨਾਂ ਕੋਲ ਨਾਲ ਬਰਿਆਦਾ ਹੈ ਉਹ ਪੁੱਠੀਆਂ ਕਰਦੇ ਨੇ ਪਰ ਕਰਮਾ ਦਾ ਬੁੱਧੀ ਵਾਲੀਆਂ ਕਰਨੀਆਂ ਹੈ ਹੈ? ਪਰ ਕਰਮਾ ਬੁੱਧੀ ਵਾਲੀਆਂ ਕਰਨੀਆਂ ਸੀ ਉਹ ਇਹ ਮਨ ਬੁੱਧੀ ਵਾਲੀਆਂ ਵਰਕਾਰ ਬੁੱਧੀ ਛੋਟੀਆਂ ਬ विवेक ਬੁੱਧੀ ਬ विवेक ਵੜਾਣ ਕੋਈ ਕਵੀਰ ਬ ਐਸੋ ਵਰ ਪਾਇਓ ਜਾਂ ਕਾ ਜੋ ਬਵੇਕ ਵਿਚਾਰ ਆ ਰਿਹਾ ਉਹ ਸੱਜੇ ਪਾਸੇ ਆ ਉਹ ਅੰਤਰ ਉਚਤ 14 ਦੀ ਹੈ ਜੋ ਬਾਹਰਲਾ ਗਿਆਨ ਸਭ ਸਾਰੀ ਸੱਚ ਹੈ ਜਿਹਦੇ ਅਸੀਂ ਪ੍ਰਮਾਣ ਦੇ ਕੇ ਸਮਝਾਉਂਦੇ ਹਾਂ ਉਹ ਮਹਾਨਾਂ ਦੇ ਪਾਸੇ ਪਹੁੰਚੇ ਸੱਚਾ ਚੁੱਕ ਤੇ ਸਮਝਾਉਣਾ ਪੈਂਦਾ ਵਿਸਾਲ ਦੇ ਕੇ ਉਹ ਦ੍ਰਿਸ਼ਟੀ ਬਹਨ ਹੈ ਕਈ ਬੈਠੇ ਇਹਦੇ ਵੀ ਕਰਨ ਲੱਗੇ ਹੋਣ ਹੈ ਕਈ ਬੈਠੇ ਇਹਦੇ ਵੀ ਕਰਨ ਲੱਗੇ ਉਹ ਚਲੋ ਵਧੀਆ ਨੰਨੇ ਨਾ ਤੋਂ ਤਾਂ ਨਾਮ ਸੰਨਗੇ ਇਹ ਸਿਮਰਨ ਆਹੀ ਸਿਮਰਨ ਆਹੀ ਹੈ ਜੀ ਤੂੰ ਤੂੰ ਨਾਮ ਲਿਆ ਨਾ ਨਾਮ ਹੈ ਦੋ ਪ੍ਰਾਪਤ ਕੀਤਾ ਗਿਆ ਪ੍ਰਾਪਤ ਕੀਤਾ ਉਹ ਨਾਮ ਕੀ ਹੁੰਦਾ ਨਾ ਹੁੰਦਾ ਨਾ ਗਰੀ ਗਿਆਨ ਆਤਮ ਗਿਆਨ ਆਤਮ ਗਿਆਨੀ ਪ੍ਰਾਪਤ ਕੀਤਾ ਦੁਨੀਆ ਵਰਦਾ ਗਿਆਨ ਪ੍ਰਾਪਤ ਕੀਤਾ ਸਾਰੇ 베ਦ ਪੁਰਾਨ ਪੜ ਲਏ ਸਾਰੇ 베ਦ ਪੁਰਾਨ ਪੜੇਗਾ ਕਿਆ ਗੋੜ ਖੜ ਚੰਦਰ ਜਸ ਭਾਰਾ ਜੋ ਖੋਤੇ ਤੇ ਚੰਤਲ ਲੱਦੀਏ ਨਾ ਉਹ ਤੈਨੂੰ ਉਹੋ ਹੀ ਬਕਰ ਖੋਤੇ ਨੇ ਕੜਾ ਵੇਚ ਕੇ ਪੈਸੇ ਮਟੜੇ ਖੋਤੇ ਤੇ ਚਾਹੇ ਹਟਾ ਲੱਦੇ ਬਿਟੀ ਲੱਦੇ ਚਾਹੇ ਚੰਤਲ ਲੱਦੇ ਉਹਦਾ ਕੋਈ ਫਰਕ ਨਹੀਂ ਸਿੱਤ ਐਵੇਂ ਤਾਂ ਜਿਹੜੇ ਯਾਦ ਕਰ ਲੈ ਵੇਦ ਪੁਰਾਨ ਪੜੇਗਾ ਕਿਆ ਗੁਣ ਖਰਚ ਅਧਰਜਸ ਭਾਰਾ RAM ਨਾਮ ਕੀ ਗਤ ਨਹੀਂ ਜਾਣੀ ਕੈਸੇ ਉਤਰਸ ਪਰ राम नाम की कथा जाननी नहीं ऐते ज्ञान का की फायदा होया तेरे दा सारे खोपड़ी ते लदले तै ग्रंथ पढ़ पढ़ के राम नाम दी कथा जाननी नाम तै लिया नहीं नाम दा तैनू पता ही नहीं लगया ज्ञान दा पता ज्ञान है तू बड़े फर्दर बड़े बड़े डॉक्टर की है ना वो ਨਾਮ ਪਤਾ ਅੱਜ ਤੈਨਾਂ ਆਵਦਾ ਪਤਾ ਨਹੀਂ ਤੁਹਾਨੂੰ ਕੀ ਹੁੰਦਾ ਨਾਮ ਦਾ ਤੁਹਾਨੂੰ ਕਰਦੇ ਹੋ ਵੀ ਹੁੰਦਾ ਨਾਮ ਕੀ ਹੈ ਗਿਆਨ ਕਹਦਾ ਤੁਹਾਨੂੰ ਨਾਮ ਦਾ ਤੁਹਾਨੂੰ ਨਹੀਂ ਪਤਾ ਜਪ ਦਾ ਤੁਹਾਨੂੰ ਨਹੀਂ ਪਤਾ ਤਪ ਦਾ ਤੁਹਾਨੂੰ ਨਹੀਂ ਪਤਾ ਸਿਵਨ ਦਾ ਤੁਹਾਨੂੰ ਨਹੀਂ ਪਤਾ ਅਜੋ ਦਾ ਪਤਾ ਹੀ ਨਹੀਂ ਆ ਪਤਾ ਲੱਗੂ ਫਿਰ ਕਰਨਾ ਸ਼ੁਰੂ ਕਰਾਂਗੇ ਜਾਂ ਨਾਮ ਦਾ ਪਤਾ ਲੱਗੂ ਫਿਰ ਜਪੜ ਦਾ फिर جب शुरू شروع کران گے تا پتہ ہی نہیں ہے جد کھیت دا ہی نہیں پتہ تیرا کیڑا ہے اوتے فصل کتے کھڑی ہے کھیت دا پتہ نہیں قبضہ لے آ جی کہنا میرا باغ لگا ہے اوتے باغ تیرا کتے لگا ہے کتے لگا ہوا ہے دیکھ کے ਜੋ ਪਡਰ ਸੀ ਉਹ ਅਜਦਾ ਵਿਦਵਾਨ ਉਹ ਪਡਰ ਸੁਦੇ ਵਿਦਵਾਨ ਜਿੱਥੇ ਇਹ ਪਡਤਵਾ ਤੇ ਖੜੀ ਆ ਗੱਲ ਅੱਜ ਦੇ ਵਿਦਵਾਨ ਤੇ ਵੀ ਇਹ ਗੱਲ ਸਾਰੀ ਲਾਗੂ ਹੈ ਵਿਦਵਾਨ ਉਹਦਾ ਹੀ ਅੰਤਰੂਕ ਹੈ ਰਦੀ ਹੁੰਦੀ ਹੈ ਕੰਨ ਆ ਬਾਣੀ ਬੇਲੋ ਬਾਜ਼ਾਰ 'ਚ ਵਿਚਾਰ ਸੀ ਜੇ ਕੋ ਗੁਰਬਖੋਏ ਜੇ ਕੋ ਗੁਰਬਖੋਏ ਜੇ ਹੋਵੇ ਕੋਈ ਗੁਰਬਖੋ ਗੁਰਬਖੋਤਾ ਦੀ ਹੈ ਬੜਾ ਕੁਸ਼ਲ ਜੇ ਕੋ ਹੋਵੇਗੇ ਤੇ ਜੇ ਕੋ ਬਧਰੇ ਵਿਚਾਰਦਾ ਰਹੇ ਹੁਣ ਉਥੇ ਇਹ ਬਾੜੀ ਵਾਹਪੁਰਖ ਕੀ ਵਾਹਪੁਰਖ ਤਾਂ ਇੱਕੋ ਹੀ ਹੈ ਇਥੇ ਜਿਹੜਾ ਨੇ ਪੱਲੇ ਕੱਖ ਦਿੱਤੀ ਸਾਰੇ ਹੀ ਨੇ ਕਾਏ ਐ ਨਹੀਂ ਕਹੋ ਭਾਈ ਵਾਹਪੁਰਖ ਦਾ ਇੱਕ ਲਿਖਿਆ ਹੋਇਆ ਜਿਹਦੀ ਬਾੜੀ ਹੈ ਨਾਨਕ ਵਾਹਪੁਰਖ ਦੀ ਨਾਮ ਗੁਰੂ ਜੀ ਨੇ ਬੁਲਾਇਆ ਉਹ ਉਹ वाणी पे गुरु थोड़ी कादी है या तू बंदे सिखया है तो कुछ नहीं सुभजे कुछ नहीं की कहदी है ओ गुरुए रोला पड़ गया ने ए वाणी महापुरुष की महापुरुष का है बोली जाए वाणी किसे ने उने बुलाया है बुलाया बोले खसका जैसी मैं आबा खसकी वाणी तै थोड़ा करी ध्यान पे ला लो ओ जेड़ा खास वो महापुरुष खा है वो ਉਦੀ ਜੇਗਾ ਆ ਬੜ ਕੇ ਲੋੜ ਕੀ ਸੀ ਪਾੜੀ ਵਿਚਾਰਦੀ ਫਿਰ ਇੱਕ ਫਿਰ ਲੋੜ ਕਾਦੀ ਰਹੀ ਆਵੇ ਪੂਰੇ ਹੋ ਗਏ ਸਭ ਕੋ ਪੂਰਾ ਆਪੇ ਹੋਵੇ ਘਟ ਨਾ ਕੋ ਅੱਖ ਪਤ ਪਾਈਏ ਤਾਂ ਨਾਨਕ ਤੋਂ ਲਿਆ ਫਿਰ ਪੈ ਗਿਆ ਵਟਾ ਸੱਚ ਦਾ ਉਹ ਪਤਾ ਲੱਗ ਜੂ ਕਿਹੜੇ ਕਿਹੜੇ ਕਿੱਥੇ ਖੜੇ ਸੀ ਥੋੜੇ ਥੋੜੇ ਪੂਰੇ ਨੇ ਪਤਾ ਉਜਾਹ ਹੁਣ ਹੈ ਸਾਜਰਾ ਵਟਾ ਜੇ ਪਿਛੇ ਪੈ ਜਾਣਾ ਸੱਚ ਪ੍ਰਗਟ ਹੋ ਜਾਣਾ ਆਪੇ ਪਤਾ ਲੱਗ ਜੂ ਸਾਰਿਆਂ ਨੂੰ ਇਹ ਘਟਕਾਉੜ ਦੀ ਵੱਟ ਕਾਉੜ ਦੀ ਕੀ ਸੀ ਗੱਲ ਚਾਚਾ ਚੀਜਾ ਐਨਸ ਮੁੜੇ ਨੰਨੇ ਜਿਹੜਾ ਲੱਭ ਜਾ ਇਹ ਬਾਲੇ ਦੀ ਸੈਂਸ ਆਇਆ ਜਾ ਨਾ ਨਾ ਦਦਾ ਹੁੰਦਾ ਨਹੀਂ ਲਿਆ ਦਦਾਕਾਰ ਕਰਦੇ ਤੁਸੀਂ ਉਹਦੇ ਬਸ ਨਾ ਆ ਗਏ ਕੀ ਨਾ ਤੋਂ ਉਹਦਾ ਨਾਮ ਲਿਆ ਦੇਈ ਦੇਈ ਪੱਟੀ ਇਹਨੂੰ ਨਾਲ ਲੱੱਲੇ ਨਾ ਤੋਂ ਨਾਮ ਲੱਗਿਆ ਨਾ ਯਾਨੀ ਲੱੱਣਾ ਲੱੱਣਾ ਕਹਿੰਦੇ ਇਨਕਾਰੀ ਕਰ ਲੂ ਆਪ ਲੈਣ ਤੋਂ ਇਨਕਾਰੀ ਵੀ ਹੈ ਤਾਂ ਦੀ ਲਿਆ ਲੱੱਣਾ ਲੋਰਤੀ ਸੰਸਕ੍ਰਿਤੀ ਇਨਕਾਰੀ ਇਨਕਾਰੀ ਹੈ ਅਤਰੋਂ ਇਨਕਾਰੀ ਹੈ ਤਾਂ ਦੀ ਲਿਆ ਜਨਾਕਾਰ ਜਨਾਕਾਰ ਆਇਆ ਨਾ ਜਨਾਕਾਰ ਕਰਨਾ ਇਨਕਾਰ ਕਰਨਾ ਵਾਨਨਕਾਰੀਆਂ ਤੋਂ ਨਾਮ ਲੜਤੇ ਤਾਂ ਨਹੀਂ ਲਿਆ ਚਲ ਚੁਣ ਕੇ ਸੁਣ ਕੇ ਅੰਕਾਰੀ ਸੁਣ ਕੇ ਵੀ ਨਹੀਂ ਲਿਆ ਪੜਤੇ ਨੇ ਨਾਮ ਅੰਕਾਰੀ ਤਾਲੀ ਕਾ ਛਛ ਚੀਜਾਂ ਐਨਾਂ ਚੀਚਾਂ ਐਨਾਂ ਜੂੜੇ ਐਨਾਂ ਜਾਂ ਮਾ ਪਕੜਿਆ ਤੂੰ ਜੂਟਾਂ ਜਾਂ ਪਕੜਿਆ ਅਸਲ ਤੇ ਨਾਲ ਕੰਮ ਕਰ ਰਹੇ ਹਰੇ ਯਾਰੋ ਇਹ ਕਹਿ ਰਹੇ ਨੇ ਕਿ ਤੂੰ ਖੁਦ ਹੀ ਦਾ ਫੜਿਆ ਹੋਇਆ ਜਾਂ ਮਤਲਬ ਪਰਮ ਹੁੰਦਾ ਜਦੋਂ ਤੂੰ ਦਾ ਕੋਲੇ ਪਰਬੁਜੀ ਕਰਸਿਆ ਜੀਉਂ ਜੀਉਂ ਪਰਬੋ ਬੱਦਦਾ ਕਿਉਂ ਤੇ ਉਹ ਬੁੱਧੀ ਦਾ ਨਾਸੁ ਬੁੱਧੀ ਲੋ ਜਦੀ ਬੁੱਧੀ ਵੀ ਖਰਾਬ ਨਾ ਘਰ ਕੀ ਬਲਾਈ ਵਰ ਸਫਾਈ ਬੂਸਾ ਦੇਖ ਢਾਈ ਦੇ ਵਹੀ ਕਹਿਆ ਜੇ ਸੱਚਾ ਹੋਰਦੀ ਲੀ ਲੀ ਤਾ ਆਪਣੇ ਉੱਤੇ ਆਤਮਾ ਨੂੰ ਛੱਡ ਕੇ ਸਿੱਖਿਆ ਹੋਰ ਕਿਸੇ ਦੀ ਮਨੁਖਤ ਹੋ ਲੈ ਲਈ ਤਾਂ ਯਾਬ ਜਿਹੜਾ ਹੈਗਾ ਜਦ ਤੇਰਾ ਨਾ ਸੁਰੂ ਬੁੱਧੀ ਦਾ ਬਿੱਲੀ ਜੰਮ ਬੁੱਧੀ ਅਕਲ ਜੰਮ ਤੋਂ ਨਾਲ ਲੱਗ ਜੂ ਪਰਮਤਉਰ ਰੰਦੀ ਹੈ ਹਾਲਾਂਕਿ ਪਰਮਤਉਰ ਦੀ ਖੁਰਾਕ ਹੈ ਅਕਲ ਕਿਉਂਕਿ ਲੈਡ ਦੀ ਖਰਾਕੀ ਹੈ ਨੇਰਾ ਜਿਨਾ ਜਿਹੜਾ ਸੂਰਜ ਜੀ ਚੜਿਆ ਹੋਇਆ ਸੂਰਜ ਦੀ ਲੈਡ ਆਉਣਾ ਜਿਹਦੇ ਨੂੰ ਖਾਈ ਜਾਂਦਾ ਖਾਈ ਜਾਂਦਾ ਹੈ ਸੂਰਜ ਗਾਬ ਨੇ ਰਹੇ ਰੁਤੀ ਜੰਮ ਦਾ ਪਕੜਿਆ ਨਾ ਬੁੱਧਾ ਪਰਮਦੇ ਪਰਮਦਾ ਪਕੜਿਆ ਮੈਂ ਤੂੰ ਛੁਟਿਆ ਗੁਰ ਛੁੱਟੀ ਸਭ ਦਾ ਨજર ਪਰ ਹੁੰਦਾ ਪਕੜਿਆ ਹੁੰਦੇ ਅੱਛੇ ਅੱਛੇ ਚੀਜ਼ ਇਹਨਾਂ ਸਮੂਹੇ ਚੀਜ਼ਾਂ ਅਨ ਦੇ ਦਰ ਪਰ ਦੰਤਰੀ ਬੁੱਧੀ ਨਾਜ਼ੁਈਅਤ ਹੀ ਹੈ ਜੇ ਅੰਰੋਂ ਜੋ ਗਿਆਨ ਹੈ ਨਾ ਜਾਂਦਾ ਲੋਕਾਂ ਦਾ ਗਿਆਨ ਘੱਟੀ ਜਾਂਦਾ ਹੈ ਸੱਚਾ ਗਿਆਨ ਘੱਟੀ ਜਾਂਦਾ ਕਿਉਂ ਗੁਰਬਤ ਦਾ ਗਿਆਨ ਹੈ ਜੀ ਨਾ ਵਰਮਤੇ ਬਿਨਾ ਹੋਰੇ ਕੋਈ ਪ੍ਰੋਸੀ ਜਾਂਦੇ ਨੇ ਵਰਮਤ ਛੱਡ ਕੇ ਜੇ ਗੁਰਮਤ ਗਿਆਨ ਗਿਆਨ ਵੱਧਦਾ ਭਰਮ ਘਟਦਾ ਕੁੜ ਭਰਮ ਵੱਧਦਾ ਗਿਆਨ ਘਟਦਾ ਜਿਹੜੇ ਚਾਗ ਨਹੀਂ ਜਾਣਦੇ ਨਾ ਉਹ ਤੇਰੇ ਤੇ ਅਖ ਵੀ ਪੜ੍ਹਦੇ ਉਹਦੇ ਨਾਲ ਭਰਮ ਵੱਧਾ ਗਿਆਨ ਘੜਦਾ ਚਾਈ ਰਾਣੀ ਜੀ ਗੁਰਮਤ ਸਮਝਦੇ ਗਿਆਨ ਵੱਤਾ ਪਰ ਦਾ ਨਾਮ ਹੁੰਦਾ ਪੜਤ ਦਾ ਪਾਦੇ ਵਾਲਾ ਪਾਦੇ ਵਾਲਾ ਜਿਹੜਾ ਹੈ ਨਾ ਗਿਆਨ ਸਾਡੇ ਕੋਲ ਹੈ ਵਾਲਾ ਉਹ ਪਾਦੇ ਵਾਲੀ ਆਰਦਾਸ ਰੱਖਾ ਦੀ ਹੋਈ ਹੋਈ ਉਹਿਆ ਤੋਂ ਹੀ ਇਹਨਾਂ ਦੀ ਗਿਆਨ ਘੜੀ ਜਾ ਗਿਆਨ ਹੈ ਵੀ ਤੋ ਚਾਰ ਆਇਆ 50 ਪਰ ਲਵਰ ਤੇ ਪਰਮਾਰ ਦਾ ਬਗਾਇਦਾ